सुनो मोहल्ला तीजा रेणायर माहें अनंत है कूड़ी आवे जाए भाणे चले अपने बहुत ही लहै सजाए सूरज नु कहंदे रेणायर अत् आकाश नु कला ने सूरज दे विच है हां जी आवे जाए जिथे रोशनी नहीं, नहीं है ਉਹ ਜਾਣ ਜਾਣ ਜਿਹੜਾ ਰੋਸ਼ਨ ਮਨ ਜਿੱਤੇ ਪ੍ਰਕਾਸ਼ ਹੈ ਬ੍ਰਹਮ ਗਿਆਨੀ ਕਾ ਮਨ ਪ੍ਰਕਾਸ਼ ਜਿਹੜਾ ਤੁਹਾਨੂੰ ਪ੍ਰਕਾਸ਼ ਉਹ ਨਹੀਂ ਆਉਣ ਜਾਣ ਦੇ ਵਿੱਚ ਜਿੱਤੇ ਰੋਸ਼ਨੀ ਹੈ ਨਹੀਂ ਰੋਸ਼ਨੀ ਦੀ ਗੱਲਾਂ ਕਰਦਾ ਐਵੇਂ ਗਿਆਨ ਕਰਾਉਂਦਾ ਕੂੜਾ ਉਹ ਹੈ ਗਿਆਨ ਕਰਾਉਂਦਾ ਸਾਖੀਆਂ ਸੁਣਾਉਂਦਾ ਅੰਦਰ ਭਰਮ ਹੈ ਪਰਮਤੂ ਰਹਿਤ ਰਹਿਣ ਵਾਲਾ ਪਰਮ ਨਹੀਂ ਹੋ ਰਹਿਣ ਵਾਲਾ ਪਰਮ ਦਾ ਨਾਸ ਕਰਨ ਵਾਲਾ ਰਹਿਣ ਵਾਲਾ ਜਿਹੜਾ ਕਹਿੰਦਾ ਮੈਂ ਇਹਨੂੰ ਭਰਮ ਹੈ ਨਹੀਂ ਪਰਮ ਹੈਗਾ ਉਹ ਜਮਣਾ ਮਰਦਾ ਹੈ ਤੇ ਆਪ ਰਹਿਣਾ আর বিਛੋੜਿਆ ਪੜਦੇ ਆ ਉੱਥੇ ਕੀ ਰਹਿਣਾ ਭਾਵ ਹੁਕਮ ਨਹੀਂ বিਛੋੜਿਆ ਹੁਕਮ ਨਾਲੇ ਅਟ ਹੋਇਆ ਜਮਣਾ ਮਨ ਹੁਕਮ ਦੇ ਵਿੱਚ ਹੀ ਹੈ ਨੂੰ ਕਹਿਣਾ আর বিਛੋੜਿਆ ਰਹ ਸੰਖ ਮਜੂਰ ਹੈ ਸੰਖ ਤੈਨੂੰ ਵਿਛੋੜਦਾ ਤੈਨੂੰ ਇਕੱਲਾ ਛੱਡ ਦਿੱਤਾ ਹੁਣ ਤੂੰ ਆਪਣੇ ਅੰਦਰ ਹੀ ਟਿਕਿਆ ਫਿਰ ਕਹਿ ਰਹ ਹੋਰੇ ਸੰਖ ਮਜੂਰ ਹੁਣ ਤੂੰ ਚੁੱਪ ਕਰਕੇ ਬੈਠਾ ਰਹਿ ਅੰਦਰੇ ਦੇਵਲੋ ਦੇਵਲ ਤਾਂ ਵੀ ਦੇਸਾਂ ਉੱਪਰ ਸੂਰਜਾ ਸੂਰਜੇ ਚੜੂਗਾ ਬਸੇਰਾ ਬੋਲ ਨਹੀਂ ਬੋਲਣਾ ਸਾਰਿਆਂ ਨੂੰ ਤੈਨੂੰ ਸਬਕ ਦੇਣਾ ਪੈਣਾ ਸਾਰਿਆਂ ਨੂੰ ਉਪਦੇਸ਼ ਦੇਣਾ ਪੈਣਾ ਫੇਰ ਗੋਲੀ ਚਾਈ ਉਹ ਇਹ ਗੱਲ ਕਹੀ ਸੀ ਪਰ ਇਹਨਾਂ ਨੂੰ ਮਾਨੇ ਚਿੱਤ ਛੱਡਿਆ ਹੋਇਆ ਰੈਨਾਰ ਤੋਂ ਵਿਛੜਿਆ ਹੋਇਆ ਤਾਂ ਹੀ ਨੂੰ ਕਿਹਾ ਵੀ ਤੂੰ ਚੁੱਪ ਰਹਿ ਤੂੰ ਸ਼ਬਦ ਗੁਰੂ ਤੋਂ ਵਿਛੜਿਆ ਹੋਇਆ ਤੂੰ ਆਲੇ ਚੁੱਪ ਰਹਿ ਸ਼ਬਦ ਗੁਰੂ ਹੀ ਹੋਗੇ ਰੈਨਾਰ ਫਿਰ ਜਿਹਨੇ ਅ ਦਾ ਨਾਸ ਕਰ ਸ਼ਬਦ ਗੁਰੂ ਹੋਊਗਾ ਬੁੱਧ ਤੋਂ ਰੋਸ਼ਨੀ ਹੈ ਹੀ ਨਹੀਂ ਸੰਸਾਰ 'ਚ ਬ੍ਰह्म ਗਿਆਨ ਹੈ ਜਿਹੜਾ ਵਿਵੇਕ ਹੈ ਉਹਦੇ ਵਿੱਚ ਅਨੰਤ ਗਿਆਨ ਹੈ ਜਿਹੜੇ ਬਬੇਤੀ ਬਣੇ ਫਿਰਦੇ ਨੇ ਗਿਆਨ ਹੈ ਨਹੀਂ ਕੁਝ ੁੱਠੇ ਨੇ ਉਹ ਆਉਣ ਜਾਣ ਜਮਣਵਰਣ ਚ ਨਹੀਂ ਇਹ ਵਾਕਈ ਬਵੇਕੀ ਹੈ ਨਹੀਂ ਹੈ ਜੇ ਕਹਿੰਦਾ ਬਵੇਕੀ ਬਵੇਕੀ ਹੈ ਨਹੀਂ ਬੁੱਧ ਬਵੇਕਾ ਹੈ ਨਹੀਂ ਤਾਂ ਜਮਣਵਰਣ ਚ ਹੈ ਨੇ ਅਸੀਂ ਗਿਆਨਵਾਨ ਗਿਆਨੀ ਹੈ ਨਹੀਂ ਕਹਿੰਦੇ ਨੇ ਬ੍ਰह्म ਗਿਆਨੀਆ ਅਗਰ ਬ੍ਰह्म ਗਿਆਨੀ ਹੈ ਨਹੀਂ ਕੁੜੋ ਕੁੜੀ ਨੇ ਉਠੇ ਨੇ ਠੀਕ ਹੈ ਰਣਾਰ ਤੋਂ ਆਪਾਂ ਸੂਰਜ ਲਵਾਂਗੇ ਸਮੁੰਦਰ ਲਵਾਂਗੇ ਤੇ ਆਕਾਸ਼ ਲਵਾਂਗੇ ਨਵਾਂ ਸੂਰਜ ਸੂਰਜੇ ਅਸੀਂ ਲਵਾਂਗੇ ਸ਼ਬਦ ਗੁਰੂ ਅੱਛਾ ਜੀ ਹਾਂ ਕੀ ਸ਼ਬਦ ਗੁਰੂ ਵਿੱਚ ਤਾਂ ਬਥੇਰੀ ਬਰਕਤ ਹੈ ਪਰ ਜਿਹੜੇ ਬਰਕਤ ਦਾ ਫਾਇਦਾ ਨਹੀਂ ਉਠਾਉਂਦੇ ਉਹ ਫਕੂੜਿਆਂ ਤੇ ਆਉਂਦੇ ਜਾਂਦੇ ਹਨ ਜੀ ਕਹਿੰਦੇ ਨੇ ਅਸੀਂ ਸ਼ਬਦ ਨਾਲ ਜੁੜੇ ਹੋਇਆ ਜੋ ਹੈ ਜੁੜੇ ਹੋਏ ਨਹੀਂ ਅੱਛਾ ਜੀ ਨਾਦ ਵੱਜਦਾ ਨਾਦ ਸੁਣਦਾ ਕਹਿੰਦੇ ਨੇ ਜੁੜੇ ਹੋਏ ਹੈ ਨਹੀਂ ਉਹ ਕੂੜੇ ਨੇ ਠੀਕ ਹੈ ਸ਼ਬਦ ਗੁਰੂ ਨਾਲ ਜੁੜੇ ਹੋਏ ਫਿਰ ਆਪਣੀ ਮਰਜ਼ੀ ਕਿਉਂ ਕਰਦੇ ਹੋ ਆਪਣੇ ਪਾਣੇ ਕਿਉਂ ਚੱਲਦੇ ਹੋ ਗੁਰਕੇ ਪਾਣੇ ਚੱਲੋ ਜਿਹੜੇ ਹੁਕਮ ਨਾਲ ਜੁੜੇ ਹੋਏ ਨੇ ਉਹ ਹੁਕਮ ਦੇ ਹੁਕਮ ਅਨੁਸਾਰ ਹੀ ਚੱਲਣਗੇ ਉਹ ਨਹੀਂ ਆਪਣੇ ਪਾਣੇ ਚੱਲਦੇ ਹੁੰਦੇ ਪਾਣੇ ਚੱਲਣੇ ਆਪਣੇ ਆਪਣੇ ਭਾਣੇ ਛੱਡਦੇ ਹਾਂ ਕਹਿੰਦੇ ਹੋ ਕੁਝ ਹੋਰ ਬੋਦੀ ਲਾਈਨ ਸਜਾਏ ਠੀਕ ਹੈ ਜੀ ਹਾਂ ਜੀ ਰੈਣ ਆਇਰ ਮੈਂ ਸਭ ਕੁਛ ਹੈ ਕਰਮੀ ਪੱਲੇ ਪਾਏ ਨਾਨਕ ਨੌਨੇ ਦੀ ਪਾਈ ਹੈ ਜੇ ਚੱਲੈ ਤਿਸੈ ਰਜਾਈ ਰੈਣ ਆਇਰ ਸਭ ਕੁਛ ਹੈ ਕਰਤਾ ਤੇਰੇ ਸਭ ਕੁਛ ਹੈ ਉਹਦੇ ਕਰਤਾ ਸਭ ਕੁਛ ਹੈ ਉਹਦੇ ਦਾ ਵਿੱਚ ਸਭ ਕੁਛ ਹੈ ਪੱਲੇ ਕੀ ਪਵੇ ਪਰ ਪੱਲੇ ਤਾਂ ਤਾਂ ਪਵੇ ਸ਼ਬਦ ਨਾਲ ਜੁੜਿਆ ਹੋਵੇ ਕਲਵੀ ਬੱਲੇ ਪਾਏ ਜਿਹਦੇ ਕਿਰਪਾ ਹੋਦੀ ਹੈ ਉਹਦੇ ਬੱਲੇ ਪੈਂਦਾ ਕੁਝ ਜਿਹੜੇ ਬਿਲਕੁਲ ਵਾਕਿਆ ਇਹਨੂੰ ਸ਼ਬਦ ਗੁਰੂ ਨੇ ਜਿਹਨੂੰ ਲੜਾ ਪੜਾ ਫੜਾ ਦਿੰਦਾ ਹੈ ਜਿਹਨੂੰ ਆਪਣੀ ਬਾਹ ਦੇ ਦਿੰਦਾ ਹੈ ਉਹਦੇ ਹੀ ਨਾਨਕ ਨੌਨਿੱਤ ਪਾਈ ਹੈ ਜੇ ਚੱਲੇ ਪਿੱਛੇ ਨਿਜਾਏ ਨਾਨਕ ਨੇ ਨੌਨਿੱਤ ਨਮਾਖਜਾਨਾ ਨੌਨਿੱਤ ਹੀ ਨਿੱਕ ਵਜਨ ਆਤਮ ਗਿਆਨ ਦਾ ਪ੍ਰਾਪਤ ਹੋ ਜਾਂਦਾ ਉਹਨੂੰ ਜੇ ਉਹ ਦੀ ਚ ਚੱਲੇ ਜੇ ਬਾਣੀ ਚ ਚੱਲੇ ਜੇ ਹੁਕਮ ਚੱਲੇ ਪਰ ਉਹ ਤਾਂ ਆਪਣੇ ਬਾਣੇ ਚੱਲਦੇ ਨੇ ਕਹਿੰਦੇ ਨੇ ਅਸੀਂ ਨਾਲ ਬਾਈਦਾ ਸਾਡੇ ਅੰਦਰ ਚੱਲਦੇ ਨੇ ਆਪਣੇ ਬਾਣੇ ਆ ਦੋਹਾਂ ਦਾ ਵਿਸ਼ਲੇਸ਼ਣ ਹਾਂਜੀ ਨਾਨਕ ਨੌਨੀ ਦੀ ਪਾਈ ਹੈ ਜੇ ਚੱਲੇ ਤੇ ਸਿਰ ਸਾਈ ਨੌਨੀ ਪਾਈ ਜੇ ਚੱਲੇ ਤੇ ਸਿਰ ਜੇ ਉਹ ਵੀ ਰੇਲਾ ਚੱਲੇ ਚੱਲੇ ਜਿਓ ਹੁਕਮ ਬੁੱਝਿਆ ਤਾਂ ਉਹਨੇ ਵੀ ਚੱਲੋ ਫਿਰ ਹੁਕਮ ਬੁੱਝ ਪਰੰਪਰਿ ਹੁਕਮ ਦਾ ਕਹਿੰਦੇ ਬੁੱਝਿਆ ਚੱਲਦੇ ਹੁਕਮ ਦੇ ਵਿੱਚ ਹੈ ਨਹੀਂ ਬੁਝਿਆ ਹੀ ਹੈ ਨਹੀਂ ਝੂਠ ਬੋਲਦੇ ਨੇ ਠੀਕ ਹੈ ਇਹ ਫਿਰ ਨੌਨਿਦ ਜਿਹੜਾ ਇੱਕ ਵਚਨ ਹੈ ਜੀ ਨਵਾਂ ਖਜ਼ਾਨਾ ਨੌਨਿਦ ਪਾਈ ਹੈ ਅਨਾਮ ਦਾ ਖਜ਼ਾਨਾ ਲਿਖਿਆ ਹੋਇਆ ਵੀ ਨਹੀਂ ਲੋਕਾਂ ਨੂੰ ਲੱਭਿਆ ਖੋਜ ਹੋਇਆ ਤੁੰਮੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਹੀ ਹੈ ਹਾਂ ਕਹਾ ਖੋਜ ਨਹੀਂ ਕੀਤੀ ਕਿਸੇ ਨੇ ਹਾਂਜੀ ਮਹੱਲਾ ਤੀਜਾ ਸਹਿਜੇ ਸਤਗੁਰ ਨਾ ਸੇਵਿਓ ਵਿੱਚ ਹਉਮੈ ਜਨਮ ਬਿਨਾਸ ਰਸ ਨਾ ਹਰ ਰਸ ਨਾ ਚਖਿਓ ਕਮਲ ਨਾ ਹੋਇਓ ਪ੍ਰਗਾਸ ਸਹਿਜੇ ਸਤਗੁਰ ਨਾ ਸੇਵਿਓ ਸਤਗੁਰ ਦੀ ਸੇਵਾ ਨਹੀਂ ਕੀਤੀ ਸਹਿਜ ਅਵਸਥਾ ਜੋ ਕੇ ਟਿੱਕੇ ਮਨ ਨੇ ਟ ਟਿਕਿਆ ਹੀ ਨਹੀਂ ਜੇ ਮਨ ਨੇ ਨਹੀਂ ਟਿਕਿਆ ਤਾਂ ਗੁਰਬਾਣੀ ਕਿਵੇਂ ਬਚਾ ਲੂ ਗੁਰवाणी ਵਿਚਾਰ ਨਾ ਪੜ ਸਕੇ ਨਾ ਵਿਚਾਰ ਸੱਜ ਜਨਾ ਚਰਮਾਂ ਟਿਕਦਾ ਨਹੀਂ ਉਹ ਪੜਨਾ ਨਹੀਂ ਹੈ ਉਹ ਵਿਚਾਰ ਨਾ ਨਹੀਂ ਹੈ ਜਿਹੜਾ ਜਰਮਨਸ ਹੈ ਜਿ ਵਸਤਾ ਜ ਨਹੀਂ ਆਉਂਦਾ ਸੇਬਿਓ ਦੇਖੋ ਹਮੈ ਜਨਮ ਬਣਾਸ ਪੜਦਾ ਹਉ ਮੇਰੇ ਵਿੱਚ ਰਸਨਾ ਗੀਤ ਗਾਉਂਦੀ ਹੈ ਤੇ ਚ ਜਨਮ ਬਣਾਸ ਹਉ ਮੇਜ ਜਮੇ ਜੀ ਹਉ ਮੇਜ ਮਰ ਗਿਆ ਜਮਨੇ ਨਹੀਂ ਟਿਕਿਆ ਉਹ ਮੰਨ ਲੈ ਵੀ ਤਾਂ ਇੱਛਾ ਪਈ ਜਾਂਦੀ ਪ੍ਰਗਟ ਹੋਈ ਜਾਂਦੀ ਨੇ ਮੂਨਾ ਪਰੀ ਜਨ ਮਾ ਮੇ ਜੇ ਮੇਰੀ ਹੋਮੇ ਕੇ ਮਰ ਗਿਆ ਰਸਨਾ ਹਰ ਰਸ ਨਾ ਚਖਿਓ ਰਸ ਨਹੀਂ ਚਖਿਆ ਨਾ ਹੋਇਓ ਹਿਰਦੇ ਚ ਪ੍ਰਗਾਸ ਕੇ ਹੋ ਜਾਂਦਾ ਕਮਲ ਹਿਰਦੇ ਚ ਪ੍ਰਗਾਸ ਆਣਣ ਕੇ ਹੋ ਜਾਂਦਾ ਹਰ ਰਸ ਚਖਿਆ ਹੀ ਨਹੀਂ ਬੁੱਧੀ ਨੇ ਬੁੱਧੀ ਨੂੰ ਤਾਂ ਹਰ ਰਸ ਗਿਆਨ ਹੀ ਨਹੀਂ ਹੋਇਆ ਗੁਰਬਾਣੀ ਵਿਚਾਰੀ ਨਹੀਂ ਹਰ ਰਸ ਦਾ ਗਿਆਨ ਹੋਇਆ ਨਹੀਂ ਹਰ ਰਸ ਦਾ ਟੇਸ ਆਇਆ ਨਹੀਂ ਪ੍ਰਗਾਸ ਐਵੇਂ ਹੋ ਜਵੇ ਹਿਰਦੇ ਚ ਵਰਗਾਸ ਤਾਂ ਹੁਣ ਰਸਨਾ ਤੋਂ ਭਾਵ ਆ ਪਰ ਚੇਤਨ ਬੁੱਧੀ ਲਵਾਂਗੇ ਹਾਂ ਜੀ ਹਾਂ ਜੀ ਬੁੱਧੀ ਹੁੰਦੀ ਹੈ ਚੇਤਨ ਠੀਕ ਹੈ ਜੀ ਵਿਖ ਖਾਦੀ ਮਨਮੁਖ ਮੂਆ ਮਾਇਆ ਮੋਹ ਵਿਨਾਸ਼ ਇੱਕ ਸਰਕੇ ਜੀਵਨ ਤ੍ਰਿਗ ਵਾਸ ਵਿਖ ਖਾਦੀ ਮਨਮੁਖ ਮੂਆ ਉਹ ਵਿਖ ਖੰਡਰਿਆ ਮਾਇਆ ਮਨਮੁਖ ਆਖਰ ਭਰ ਗਿਆ ਮਾਇਆ ਮੋਹ ਵਿਨਾਸ਼ ਮਾਇਆ ਮੋਹ ਫਸ ਗਿਆ ਨਾ ਨਾਸ ਹੋਈ ਨਾਸ ਹੋ ਗਿਆ ਸਭ ਕੁਝ ਨਾਸ ਹੋ ਗਿਆ ਮਾਇਆ ਮੋਹ ਜਿਹੜੇ ਮਾਇਆ ਮੋਹ ਫਸੇ ਨੇ ਸਭ ਕੁਝ ਨਾਸ ਹੋ ਜਾਣਾ ਉਹਨਾਂ ਦਾ ਇੱਕ ਹਜ਼ਾਰ ਕੇ ਨਾਮ ਲੈ ਤ੍ਰਿ ਜੀਵਨ ਤ੍ਰਿਗ ਨਾ ਪ੍ਰਾਪਤ ਹੋਇਆ ਤਾਂ ਜਿਉਣਾ ਤਰਗਾ ਤੇ ਕਾਹ ਜੀਵਨ ਨੂੰ ਤੇ ਕਾਹ ਰ ਨੂੰ ਚਾਹੇ ਮਹਿਲਾਂ 'ਚ ਬਸਦਾ ਹੋਵੇ ਤੇਰੇ ਜੀਵਨ ਤ੍ਰਿਗ ਵਾਸ ਬੜੇ ਬੜੇ ਨਾਸ ਜਿੰਨੇ বাসਦੇ ਨੇ ਬੜੇ ਬੜੀਆਂ ਆਲਿਸ਼ਾਨ ਬਿਰਨਾਂਜ ਵਸਦੇ ਨੇ ਮਹਿਲਾ ਹੀ ਵਸਦੇ ਜੀਵਨ ਦੇ ਕਰੇ ਪ੍ਰਭ ਸੱਚਾ ਆਂ ਦਿਨ ਸੇਵਾ ਕਰੇ ਸਤ ਗੁਰੂ ਕੀ ਪ੍ਰਭ ਇਹ ਨ ਛੋੜੇ ਪਾਸ ਜੇ ਆਪੇ ਨਦਰ ਕਰੇ ਪ੍ਰਭ ਸੱਚਾ ਜਦੋਂ ਸੱਚਾ ਪ੍ਰਭ ਆਪ ਨਦਰ ਕਰਦਾ ਕਿਰਪਾ ਕਰਦਾ ਤਾਂ ਹੋਵੇ ਦਸਨ ਦਾਸ ਫਿਰ ਉਹ ਦਾਸਾਂ ਦਾ ਵੀ ਦਾਸ ਹੋ ਜਾਂਦਾ ਦੇਖੋ ਗੁਰੂ ਨੀ ਬਣਦਾ ਦਾਸਾਂ ਦਾ ਦਾਸ ਹੁੰਦਾ ਜਿਹੜੇ ਉਸ ਵੇਲੇ ਭਗਤ ਹੁੰਦੇ ਨੇ ਉਸ ਵੇਲੇ ਕੋਈ ਵਿਆਖਿਆਕਾਰ ਹੁੰਦੇ ਨੇ ਉਸ ਵੇਲੇ ਦਾਸ ਬਣ ਕੇ ਰਹਿੰਦਾ ਉਹ ਵੀ ਕਹਾ ਹੁੰਦੇ ਨੇ ਪਹਿਲਿਆਂ ਦੇ ਤਾਂ ਹੋਏ ਦਾਸਾਂ ਦਾਸ ਇਹ ਨੂੰ ਕਿਹਾ ਜੀ ਮਨ ਦਾਸਾਂ ਦਾਸ ਹੋ ਜਾ ਮਨ ਨਹੀਂ ਦਾਸਾਂ ਹੋਣਾ ਹੋਰ ਕੀ ਨੇ ਮੋਤੀ ਹਾਂਜੀ ਤਾਂ ਅਨੰਦਨ ਸੇਵਾ ਕਰੇ ਸਤਗੁਰੂ ਕੀ ਕਬੈ ਨ ਛੋੜੇ ਪਾਸ ਫਿਰ ਸਤਗੁਰੂ ਦੀ ਸੇਵਾ ਕਰਦਾ ਲਗਾਤਾਰ ਫਿਰ ਉਹਦਾ ਪਾਸ ਨਹੀਂ ਛੱਡਦਾ ਫਿਰ ਉਹਦਾ ਪੱਲਾ ਨਹੀਂ ਛੱਡਦਾ ਫਿਰ ਛੱਡ ਕੇ ਤੇਰਕੁਟੀ ਜਾਂਦਾ ਹੀ ਨਹੀਂ ਫਿਰ ਹਮੇਸ਼ਾ ਲਈ ਪਰਮਾਨੈਂਟਲੀ ਛੁੱਟ ਜਾਂਦੀ ਹੁਕਮ ਜਿੱਤੇ ਕਿ ਜਾਂਦਾ ਹੈ ਫਿਰ ਠੀਕ ਹੈ ਉੱਪਰ ਤਾਂ ਚੱਲਿਆ ਸੀ ਸਹਜੇ ਸਤਗੁਰਨਾ ਸੇਵਯੋਗ ਪਰ ਇੱਥੇ ਹੁਣ ਸਤਗੁਰੂ ਦੀ ਗੱਲ ਆ ਰਹੀ ਹੈ ਸਤਿਗੁਰੂ ਉੱਥੇ ਸ਼ਬਦ ਗੁਰੂ ਪ੍ਰਗਟ ਉੱਥੇ ਹੀ ਹੋਣਾ ਨਾ ਜਿੱਥੇ ਸਤਿਗੁਰ ਹੈ ਅੱਛਾ ਜੀ ਇੱਥੇ ਕੋਹ ਗੈ ਜਦ ਪਾਸ ਸਤਿਗੁਰ ਦਾ ਛੱਡਣਾ ਨਹੀਂ ਠੀਕ ਹੈ ਜਦੋਂ ਇਹ ਦਾਸਨ ਦਾਸ ਹੋਇਆ ਦੋ ਪਦਾਰਥ ਹੈ ਸੇਵਾ ਕਰ ਰਿਹਾ ਚਾਰ ਪਦਾਰਥ ਲੈਣ ਦੀ ਹੈ ਜੀ ਹਾਂ ਚਾਰ ਪਦਾਰਥ ਇੱਕ ਹੋ ਗਿਆ ਇੱਕ ਹੋ ਕੇ ਬਹਿ ਜੂ ਨਾਲ ਸਾਤ ਸੰਤੋ ਹੋ ਗਏ ਅਰਦਾਸ ਤਾਂ ਸੁਣ ਸੱਤ ਬਹਾਰੇ ਪਾਸ ਪਾਸ ਬਹਾਰ ਲਿਆ ਹੁਣ ਉਹ ਗਿਆਊਗਾ ਅੰਦਰੋਂ ਠੀਕ ਹੈ ਹੁਣ ਫਿਰ ਅੰਨ ਦਿਨ ਸੇਵਾ ਕਰ ਰਿਹਾ ਇੱਕ ਹੋਇਆ ਸੰਪਰਕ ਹੋ ਜੂਗਾ ਮਿਲ ਜੂਗਾ ਠੀਕ ਹੈ ਨਾਮ ਪਦਾਰਥ ਵਾਸਤੇ ਸੇਵਾ ਕਰ ਰਿਹਾ ਹੈ ਜੀ ਠੀਕ ਹੈ ਜਿਉ ਜਲ ਮੈਂ ਕਮਲ ਲਿਪਤੋ ਵਰਤੈ ਕਿਉਂ ਵਿਚੇ ਗਿਰੈ ਉਦਾਸ ਜੇ ਕਰੇ ਕਰਾਇਆ ਸਭ ਕੋ ਜਿਉ ਪਾਵੇ ਹਰ ਗੁਣਤਾਸ ਜਿਵੇਂ ਜਲ ਦੇ ਵਿੱਚ ਕਮਲ ਹੁੰਦਾ ਕਮਲ ਵੱਖਰਾ ਹੈ ਪਾਣੀ ਵੱਖਰਾ ਹੈ ਕਮਲ ਜਲ ਚੋਂ ਹੀ ਪੈਦਾ ਹੋਇਆ ਹੋਇਆ ਕਿਉਂ ਵਿੱਚੇ ਗਿਰਿਆ ਉਦਾਸ ਐਵੇਂ ਗਰਥੀ ਜੀਵਨ ਦੇ ਵਿੱਚ ਉਦਾਸ ਰਹਿੰਦਾ ਅਲੱਗ ਰਹਿੰਦਾ ਵੱਖਰਾ ਰਹਿੰਦਾ ਹੈ ਕਮਲ ਪਾਣੀ ਦੇ ਵਿੱਚ ਰਹਿਣਾ ਹੋਇਆ ਵੀ ਪਾਣੀ ਤੋਂ ਵੱਖਰਾ ਹੈ ਗੁਰਮੁਖ ਐ ਹੀ ਰਹਿੰਦਾ ਜਨਨਾਨ ਕਰੇ ਕਰਾਇਆ ਸਭ ਕੋ ਸਭ ਕੋ ਹੀ ਉਹਦਾ ਹੀ ਕਰਾਇਆ ਕਰਦਾ ਹੈ ਇਹ ਤਾਂ ਠੀਕ ਹੈ ਪਰ ਜੋ ਪਾਬ ਹੈ ਜਿਹਨ ਪਰਮੇਸ਼ਰ ਨੂੰ ਪਉਂਦਾ ਹੈ ਤੇ ਬਹਾਰ ਗੁਣ ਤਾਂਸ ਕੈਸੇ ਯਾਰ ਗੁਣ ਨੇ ਉਹਦੇ ਜਿਨੀਆਂ ਉਹਦੀਆਂ ਇੱਛਾਵਾਂ ਨੇ ਉਹ ਨਹੀਂ ਗੁਣ ਨੇ ਜੋ ਉਹਨੂੰ ਚਾਹੁੰਦਾ ਜੋ ਇੱਛਾ ਉਹਦੀ ਉਹ ਗੁਣੇ ਗੁਣ ਪਾਵੇਂ ਉਹ ਇੱਛਾ ਸਾਨੂੰ ਪੈਦਾ ਕਰਨ ਦੀ ਹੈ ਪਾਵੇਂ ਇੱਛਾ ਮਾਰਨ ਦੀ ਹੈ ਉਹ ਗੁਣੇ ਗੁਣ ਨੇ ਉਹਦੇ ਸਾਰੇ ਪਾਵੇਂ ਬੁਖਾਰ ਕਰਨ ਦੀ ਇੱਛਾ ਹੈ ਕਾਹਨੇ ਦੁੱਖ ਦੇਣ ਦੀ ਇੱਛਾ ਤੁਹਾਨੂੰ ਸੁਖ ਦੇਣ ਦੀ ਇੱਛਾ ਉਹ ਇੱਛਾ ਸਭ ਗੁਣੇ ਗੁਣਕਾਰ ਹੈ ਗੁਣਕਾਰ ਹੀ ਸਾਡੇ ਵਾਸਤੇ ਨੁਕਸਾਨ ਦੇਣੀ ਹੈ ਆਪੇ ਗਣਤ ਕੀਨੀ ਆਪੇ ਮਤ ਦਿਨੀ 36 ਜੁਗ ਗਵਾਰ ਯਾਨੀ ਆਣਗਣ ਜੁਗ ਇਹ ਕਹ ਹੈ ਇੱਕ ਸਮਾ ਪਤਾ ਨਹੀਂ ਕਰਨ ਜੋ ਗਗਵਾਰ ਰਹਾ ਅੱਛਾ ਯਾਨੀ ਜੇ ਤੋ ਰਚਨਾ ਹੈ ਨਹੀਂ ਸੀ ਜੋ ਸੁਣ ਸਮਝ ਰਹਾ ਹੈ ਉਹ ਜਿਹੜਾ ਸਾਣਾ ਹੈ ਉਹਦੇ ਬਾਰੇ ਕੋਈ ਗਿਆਨ ਨਹੀਂ ਹੈ ਕਿਸੇ ਨੂੰ ਠੀਕ ਹੈ ਜੀ ਪਰਾਰੇ ਕੁਝ ਪਸਿਆ ਜਾ ਸਕਦਾ ਉਹਦੇ ਬਾਰੇ ਗੁਵਾਰ ਹੈ ਗਿਆਨ ਸਭ ਵਾਸਤੇ ਆਪੇ ਗਾਂਤ ਕੀਨੀ ਛੱਤੀ ਯੋਗਾਂ ਦੀ ਗਾਂਤ ਕੀਨੀ ਕੀਦੀਆਂ ਕਹਿੰਦੇ ਆਪ ਹੀ ਦੱਸੀ ਹੈ ਛੱਤੀ ਯੋਗ ਸੀ ਅਸੀਂ ਕਿਹੜਾ ਕਹਿ ਹੈ ਜਿਵੇਂ ਉਹਨੇ ਕਹਾ ਹੈ ਅਸੀਂ ਕਹਤਾ ਜਿਉਨੇ ਛੱਤੀ ਕਹਾ ਹੈ ਅਸੀਂ ਛੱਤੀ ਕਾਤੇ ਬਾਦ ਉਹ ਤੇ ਪੁੱਛ ਲੋ ਗਾਲ ਆਪੇ ਕੀਤੀ ਐ ਕੀਤੀ ਹੋਊਗੀ ਉਹਨੇ ਛਤੀ ਕਹਾ ਤੇ ਛਤੀ ਕਹਤੇ ਸਾਚੂ ਉੜਾ ਤਾ ਉਹ ਤੇ ਪੁੱਛਦਾ ਸਾਨੂੰ ਸਾਰੀ ਸ੍ਰਿਸ਼ਟੀ ਆਪੇ ਸਾਜੀ ਐ ਉਹਨੇ ਆਪੇ ਸਾਰੀ ਸ੍ਰਿਸ਼ਟੀ ਨੂੰ ਅਕਲ ਦਿੰਦੀ ਐ ਮਤ ਦੀਨੀ ਸਾਰੇ ਜੀ ਜਨਤ ਨੂੰ ਮਤ ਦਿੰਦਾ ਹੀ ਰਿਹਾ ਪਹਿਲੇ ਜਨਮ ਤੋਂ ਲੈ ਕੇ ਉੱਤੇ ਤੱਕ ਅਕਲੇ ਵਧ ਹੀ ਚਲੀ ਆ ਰਹੀ ਹੈ ਤਾਹੀ ਸ਼ਬਦ ਦਾ ਗੁਰੂ ਹੈ ਉਹ ਹਾਂਜੀ ਸਿਮਰਤ ਸਾਸਤ ਸਾਜੀਆਂ ਨ ਪਾਪ ਪੁੰਨ ਗੰਤ ਗਣੀਨੀ ਜਿਸ 부ਝਾਏ ਪਤੀਨੀ ਸਮਰਤ ਸਾਸਤ ਸਾਜੀਆਂ ਦਾ ਸਮਰਤ ਵੀ ਸਾਜੇ ਘਟਕਲ ਵਾਲਿਆਂ ਤੋਂ ਦੁਪਰੇਲ ਦੇ ਕੇ ਇਹ ਵੀ ਕਰਵਾ ਲਿਓ ਨੇ ਪਾਪ ਪੁੰਨ ਗੰਤ ਗਣੀਨੀ ਪਾਪ ਪੁੰਨ ਦੀ ਗਣਤ ਭਰਤੀ ਸ਼ਾਇਦ ਉਹਨਾਂ ਨੂੰ ਪਾਪ ਪੁੰਨ ਕਹੇ ਬਿਨਾਂ ਉਹਨਾਂ ਨੇ ਸੁਧਰ ਨਾ ਨਹੀਂ ਸੀ ਉਸ ਵੇਲੇ ਪੜ੍ਹਾਈ ਦੀ ਲੋੜ ਸੀ ਉਸ ਵੇਲੇ ਇਹ ਜਿਹੀ ਪੜ੍ਹਾਈ ਦੀ ਲੋੜ ਹੋਵੇ ਉਹਨਾਂ ਲੋਕਾਂ ਨੂੰ ਘਟਿਆ ਪੜ੍ਹਾਈ ਦੀ ਲੋੜ ਹੋਵੇ ਪਾਪਨਦੇਵ ਗੰਸ ਗੈਣ ਆਲੇ ਵੀ ਸੀ ਸੱਚੇ ਸ਼ਬਦ ਪਤੀ ਨਹੀਂ ਜਿਹਨੂੰ ਬੁਝਾਉਂਦਾ ਹੈ ਵਾਲੀ ਗੱਲ ਹੈ ਕਿ ਬੁਝੀ ਸੀ ਸੱਚੇ ਸ਼ਬਦ ਪਤੀ ਅਸਲ ਵਿੱਚ ਸੱਚੇ ਸ਼ਬਦ ਤੋਂ ਤਸੱਲੀ ਨਹੀਂ ਹੁੰਦੀ ਪਾਪ ਨੂੰ ਦੀ ਜਿਹੜੀ ਵਿਚਾਰਤਾਂ ਇਹਨਾਂ ਨਾਲ ਮੰਨਦੀ ਤਸੱਲੀ ਨਹੀਂ ਹੁੰਦੀ। ਅਮਰ ਤੇ ਖਾਸ ਤਸੱਲੀ ਨਹੀਂ ਕਰਾ ਰਿਹਾ ਦੀ। ਅੱਛਾ ਉਹ ਇਹ ਮੰਨ ਨਹੀਂ ਦਿਖਦਾ ਕਿਸੇ ਨੂੰ। ਠੀਕ ਹੈ। ਉੱਪਰੋਂ ਆਪਾਂ 36 ਦੀ ਗੱਲ ਸੀ ਹਾਂ ਜੀ। ਹਾਂ ਜੀ ਹਾਂ ਜੀ। ਜਿੱਥੇ ਉਹਨਾਂ ਸਿਮਰ ਸਾਫ ਗਣਤ ਗਣੀਨੀ ਦੀ ਗੱਲ ਚੱਲ ਰਹੀ ਹੈ? ਪੰਡਤਾਂ ਨੇ ਬਾਟ ਪਾੜੀ ਹੈ। ਪੰਡਤ ਪਾੜੀ ਬਾਟ ਉਹਨਾਂ ਦੀ ਹੈ। ਅਕਾਪੇ ਇਸ ਸਭ ਆਪ ਮਤ ਦੇਨੀ ਹੈ ਜਿਹਨਾਂ ਨੂੰ ਮਤ ਦਿੱਤੀ ਹੈ ਉਹਨਾਂ ਨੇ ਸਾਝੇ ਹੈ ਜੀ ਕੁਛਾਂ ਨੂੰ ਇਹ ਜੀ ਮਤ ਦੇਤੀ ਘਟੀਆਂ ਮਤ ਦੀ ਲੋੜ ਹੋਣੀ ਹੈ ਬੁਝਾਏ ਸੋ ਬੁਝੀ ਸੀ ਸੱਚਾ ਸ਼ਬਦ ਪਤਨੀ ਜਿਹਨੂੰ ਇਹ ਗੱਲ ਹੁਣ ਬੁਝਾਵੇ ਘੱਟ ਲੋੜ ਸੀ ਕਿਸੇ ਨੂੰ ਵੱਧ ਲੋੜ ਹੈ ਜਾਏਗਾ ਜਾਂਦੀ ਲੋੜ ਹੈ ਹੋ ਜਾ ਕੇ ਜਾਂਦਾ ਇਹ ਗੱਲ ਬੁਝਣ ਵਾਲੀ ਹੈ ਜਿਹੜਾ ਬੁਝ ਲੈਂਦਾ ਉਹਨੂੰ ਤਸੱਲੀ ਹੋ ਜਾਂਦੀ ਹੈ ਤੇ ਨਹੀਂ ਤਾਂ ਰੁੱਲ ਜਾ ਫਰੀ ਜਾਂਦਾ ਇਹ ਆ ਕਿਉਂ ਹੋ ਗਿਆ ਉਹ ਕਿਉਂ ਹੋਇਆ ਆ ਇਹ ਕਿਉਂ ਹੁੰਦਾ ਆ ਇਹ ਕਿਉਂ ਹੁੰਦਾ ਤੇ ਕਹਿਣ ਦਾ ਭਾਵ ਕਿ ਹੌਲੀ ਹੌਲੀ ਉਹਨੇ ਪੌੜੀ ਜੀ ਸਭ ਦਾ ਥੱਲੇ ਦੇ ਗਿਆਨ ਵੀ ਹੈ ਉਦੋਂ ਥੱਲੇ ਦਾ ਗਿਆਨ ਸਮਝ ਸਕਦਾ ਸੀ ਹੁਣ ਉੱਤਲੇ ਗਿਆਨ ਸਮਝ ਸਕਦਾ ਸਾਰੇ ਆਦਮੀ ਉੱਤਲੇ ਗਿਆਨ ਬਣੀ ਸਮਝ ਸਕਦੇ ਹੁਣ ਵੀ ਨਹੀਂ ਸਮਝ ਸਕਦੇ ਸਾਰੇ ਉਹ ਜਿਹੜੇ ਮੂਰਤੀ ਪੂਜਾ ਕਰਦੇ ਨੇ ਉਹ ਦੂਜੀ ਗੱਲ ਸਮਝ ਨਹੀਂ ਸਕਦੇ ਉਹ ਉੱਥੇ ਕਰੀ ਜਾਣਗੇ हां जी ਜਿਹੜੇ ਅਖੰਡ ਪਾਠ ਕਰਦੇ ਆ ਉਹ ਕਹਿੰਦੇ ਪਾਠ ਕਰਨ ਚ ਲਾਭ ਹੈ ਉਹ ਸਮਝਣ ਦੀ ਜਲ ਨਹੀਂ ਕਰਦੇ ਉਹਨਾਂ ਨੂੰ ਨਹੀਂ ਕਿ ਅਗਲੇ ਕਰ ਹਾਂ ਆਪੇ ਬਖਸ਼ ਮਿਲਾਈ ਆਪੇ ਆਪ ਵਰਦਾ ਹਰ ਜਗ੍ਹਾ ਚਾਹੇ ਘਟਿਆ ਗਿਆ ਚਾਹੇ ਵਧਿਆ ਗਿਆ ਹਰੇਕ ਦੇ ਵਿੱਚ ਆਪੇ ਵਰਤਦਾ ਆਪੇ ਬਖਸ਼ ਮਿਲਾਈ ਪਰ ਚਲ ਮਿਲਦਾ ਹੋਇਆ ਜੀ ਤੇ ਬਖਸ਼ਿਸ਼ ਹੋ ਜਾਂਦੀ ਹੈ ਬਖਸ਼ਿਸ਼ ਮਿਲਦਾ ਨਹੀਂ ਹੈ ਥਰ ਨਹੀਂ ਪਹੁੰਚਦਾ ਹਾਂ ਇੱਥੇ ਵੀ ਹੁਣ ਆ ਕਾਫੀ ਹੈ ਜਿਹੜਾ ਅਖੀਰਲੀ ਪੰਕਤੀ ਦਾ ਲੱਗ ਗਿਆ ਫਿਰ ਇਹ ਉਹਦੇ ਨਾਲ ਜੁੜਦਾ ਹੈ ਜੀ ਵਾਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਹੀ ਇੱਥੇ ਸੱਤਵੀਂ ਪੌੜੀ ਸਮਾਪਤੀ ਹੈ ਜੀ